ਹਾਂਜੀ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਰੋਗ ਹੈ ਪਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਅੰਦਰ ਕਹਿੰਦੇ ਹੋਵੇ ਦਾ ਹੈ ਇਹਦਾ ਠੀਕ ਹੈ ਜੀ ਉਹ ਬੰਦੇ ਸਾਰੇ ਲੋਗੋ ਸੁਣੇ ਨਾ ਕੰਮ ਤੋਂ ਪੋਰਨੇ ਗੁਰੂ ਬੋਕ ਦੁਰਜਨ ਜਿਹੜੇ ਬੰਦ ਬੋਕ ਨੇ ਦੁਰਜਨ ਨੇ ਇਹ ਪਰਮ ਵਿੱਚ ਭੁੱਲੇ ਹੋਏ ਨੇ ਇਹਨਾਂ ਨੂੰ ਵੀ ਪਤਾ ਵੀ ਬੁਲਦੇ ਇਸ ਤਰ੍ਹਾਂ ਹੋ ਸੇਗੋ ਪਾਰ ਠੀਕ ਹੈ ਰੋਦ ਨੂੰ ਉਤਾਰ ਬੰਨੇ ਨੇ ਰੋ ਜੇ ਰੋਦ ਉਤਾਰੇ ਕੋਸਾ ਵਡਾਉਂਦਾ ਹੋਇ ਕਰੀਏ ਹੁਣ ਕੀ ਬੁਲੇ ਹੋਏ ਦੁਰਜਨੋ ਕਿ ਆਪੋ ਪੁਲੇ ਬਨ ਬੁਖ ਦੁਰਜਨੋ ਦੁਰਜਨ ਹੈ ਕਿ ਜਿਹੜਾ ਉਹ ਬੇਡਾ ਰੋਗ ਹੈ ਕਹਾਂਟਾ ਵਾਲੇ ਵੀ ਦੱਸੇ ਇਹਨਾਂ ਨੇ ਭੇਜਿਆ ਠੀਕ ਨੇ ਬਣਾ ਕੇ ਭੇਜਿਆ ਆਪਾਂ ਨੂੰ ਕੀ ਪਤਾ ਸੀ ਕਿਥੇ ਕੀ ਭਾਇਆ ਹੋਇਆ ਉਹ ਵੀ ਦੱਸਿਆ ਜੀ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਖਾਣਾ ਕਰਦੇ ਜੇ ਰੋਗ ਹੁਣ ਗੋਣ ਖਤਮ ਕਰਦੇ ਰੋਗ ਹੇਰੋ ਲਾਭ ਰਖੀਏ ਤਾਂ ਵੇ ਰੋ ਜੇ ਭਨ ਭੂਲੇ ਦੁਰਜਨ ਨੂੰ ਨਾ ਰਖਿਆ ਫੇਰ ਬਦੂਗਾ ਬੇਟਾ ਭਨ ਭੂਲੇ ਗੁਣ ਨੂੰ ਕੁਦਰਜਨ ਨੂੰ ਨਾ ਰਖਿਆ ਫੇਰ ਜਾਊਗਾ ਬਦੀ ਜੇ ਰੋ ਕਰਨ ਖਤਵਾ ਤਾਂ ਰੱਖਣਾ ਬਹੁਤ ਘਰ ਭਨ ਯਾ ਲੱਗ ਲੱਗ ਅਖਰਾਂ ਸਤਿਗੁਰੂ ਨੇ ਸਤਿਗੁਰੇ ਸਾਧੂ ਹੈ ਸਾਧੂ ਦਾ ਅਰਥ ਹੈ ਵਾ ਅੱਛਾ ਜੀ ਸਤਿਗੁਰ ਸਤਿਗੁਰ ਕੋਲ ਨੇ ਅੱਛਾ ਜੀ ਸਜਣ ਸਮਾਏ ਉਹ ਚਾਹੇ ਉਹਦਾ ਕੋਈ ਸੁਖ ਬਣੋਵੇ ਉਹਨੂੰ ਆਰੇ ਗਦੇ ਬਰੋਲੀ ਦਾ ਤੇ ਐਂ ਤੇ ਨੇ ਦੇ ਵਿੱਚ ਸਾਧੂ ਕੋ ਸਾਧੂ ਸਜਣ ਹੁਕਮ ਦੇ ਵਿੱਚ ਹੂੰ ਬਾੜਾ ਬੁਜਣ ਵਾਲੇ ਹਾਂਜੀ ਮਹਲਾ ਚੌਥਾ ਮਨ ਤਨ ਰੱਤਾ ਰੰਗ ਸਿਉ ਗੁਰਮੁਖ ਹਰ ਗੁਣਤਾਸ ਜਨ ਨਾਨਕ ਹਰ ਸ਼ਰਣਾਗਤੀ ਹਰ ਮੇਲੇ ਗੁਰ ਸ਼ਬਦ ਕੋ ਵੀ ਤਾਂ ਆਪਣੀ ਜੀਵੋ ਤੁਮ ਜਵਾਂ ਉਕੇ ਸਾਚੁਰ ਜਿਨੋ ਇਹ ਰੰਗ ਚੜ ਗਿਆ ਉਹ ਨਾਮ ਤੇ ਹਰ ਸਿਰਨਾਗਤੀ ਗੁਰ ਸ਼ਾਬਾਸ਼ ਸ਼ਾਬਾਸ਼ ਹੂੰ ਨਾ ਨਾ ਸ਼ਰਨਾਗਤੀ ਉਹਨੇ ਕਹਿੰਦਾ ਮੈਂ ਐਸੇ ਪੁਰਸ਼ਾਂ ਮੈਂ ਕਿਰਨ ਚਲ ਦੋ ਇਹ ਉਹ ਬੰਦੇ ਜਿਹੜੇ ਵਿੱਚ ਨੇ ਹਾਂ ਇਹ ਬੰਦੇ ਦੇ ਨੇ ਮੈਂ ਵੀ ਇਹਨਾਂ ਦੀ ਜਾਣ ਤੂੰ ਕਿਵੇਂ ਕੋਈ ਜਾਣ ਦੋ ਜੀ ਤੋ ਉਹ ਨਹੀਂ ਹਾਂ ਤੇ ਬਹਿਲਤਾ ਉਹਨਾਂ ਤੇ ਸਤਿਗੁਰ ਸ਼ਾਬਾਸ਼ ਹਾਂ ਉਹਨਾਂ ਤੇ ਹਾਂ ਨਾ ਕਿ ਸ਼ਾਬਾਸ਼ ਵੀ ਹੈ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀ ਹੈ ਤੁਰ ਜੇਵੜ ਹੋਏ ਸੋ ਆਖੀ ਹੈ ਤੁਰ ਜਿਹਾਂ ਤੂੰ ਹੈ ਪੜੀ ਹੈ ਕਰਤਾ ਪੁਰਖ ਅਗੰਮ ਹੈ ਤੂੰ ਕਰਤਾ ਪੁਰਖ ਅਗੰਮ ਬੁੱਧੀ ਤੋਂ ਕਿਸ ਨਾਲ ਤੋਂ ਮੰਡੀ ਹੈ ਤੇਰੀ ਵੜੀ ਆਈ ਕਿਹਦੇ ਨਾਲ ਵੜੀ ਹੈ ਹੈ ਪੜੇ ਨਾ ਤੂੰ ਇਹਦੀ ਵਡਿਆਈ ਤੇਰਾ ਮੁਹਾਵਲਾ ਕਿਹਦੇ ਨੂੰ ਕਰੀਏ ਕਿੰਨਾ ਨਹੀਂ ਕੀਤਾ ਜਾ ਸਕਦਾ ਕਿ ਤੂੰ ਤਾਂ ਜੇਵੜ ਹੋਏ ਸੋ ਆਖੀਏ ਤੂੰ ਜਿਹੜਾ ਤੂੰ ਹੈ ਪੜੀਏ ਬਸ ਜੇ ਤੇਰੇ ਇਲਾਵਾ ਕੋਈ ਹੋਰ ਹੋਵੇ ਤਾਂ ਆਖੀਏ ਹੂੰ ਹੂੰ ਅਸੇ ਹੀ ਚਾਹੀਦਾ ਤੂੰ ਨਾ ਤੂੰ ਤੇਜ਼ਾ ਤੂੰ ਜੀ ਪੰਜੀ ਕੋਈ ਨਾ ਕੋਈ ਤੇਰਾ ਕੋਈ ਨਾ ਕੋਈ ਤੇਔਰਦੀ ਜੈ ਇਸ ਪਿੰਨੂ ਜਾ ਤੇਰੀ ਬਰਾਬਰੀ ਦੀ ਜਾ ਸਕਦੀ ਤੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ ਹਾਂਜੀ ਤੂੰ ਘਟ ਘਟ ਇੱਕ ਵਰਤ ਦਾ ਗੁਰਮੁਖ ਪਰਗੜੀ ਹੈ ਦਾ ਬਸ ਉਹਦਾ ਦੇਰ ਦੇ ਦੇ ਜੋ ਪਰਗਟ ਨਹੀਂ ਹੁੰਦਾ ਕੋਲ ਮਗਾਂ ਤੇ ਨੂੰ ਫਰਗਟ ਕਰ ਰਿਆ ਉੱਤੇ ਜੰਮ ਆਇਆ ਹੀ ਪੌਂਕੀ ਹੋ ਗਿਆ ਆ ਬਾਕੀ ਦੇ ਜੋ ਹੋਣ ਵਾਲਾ ਉੱਤੇ ਅਵਸਥਾ ਜੋ ਦੀ ਐ ਠੀਕ ਦੇ ਦੇ ਜੋ ਪਰਗਟ ਸੱਚਾ ਸਭ ਦਾ ਖਸਮ ਹੈ ਸਭ ਦੂ ਤੂੰ ਚੜੀਏ ਤੂੰ ਕਰੇ ਸੋ ਸੱਚੇ ਹੋਈ ਸੀ ਤਾਂ ਕਾਇਤ ਕਰੀ ਤੂੰ ਸੱਚਾ ਤੂੰ ਸੱਚਾ ਸਾਰਿਆਂ ਨੂੰ ਤਾਂ ਹੀ ਸਭ ਦੂ ਤੂੰ ਜਿਹੜੀ ਹੈ ਸਭ ਨਾਲ ਦੇ ਹੁੱਤੇ ਤੈਨੂੰ ਤੇਰਾ ਹੁਕਮ ਸਭ ਨਾਲ ਦੇ ਉੱਪਰ ਸਵਾਰ ਠੀਕ ਹੈ ਤੂੰ ਕਰੇ ਸੀ ਇਨਾਂ ਨੂੰ ਤੂੰ ਜਿਤੇ ਤਨਾਹ ਹੋਈ ਹੋਇਆ ਜੀ ਸਰਕਾਰ ਜਿਹਨੋਂ ਤੁਮ ਸਿੱ ਇਬਰਾਹੀ ਭਰਾ ਦੇ ਸੱਚ ਦੀ ਜਾਣਕਾਰੀ ਦੇਸ ਵਿੱਚ ਹੋਈ ਸੱਚੇ ਹੋ ਸਕਦੇ ਨੇ ਤਾਂ ਤਾਇਤ ਖੜੀ ਐ ਤੇ ਲੋੜ ਐ ਵਿਦੇ ਨਾਲ پتہਵਾ ਚਿੱਤਾਂ ਦਰੰਭੇ ਖੜੀ ਲੋੜ ਐ ਇਹੇ ਬਣਾਈ ਬਸ ਉਹ ਆਪ ਸੱਚ ਸੱਚੀ ਭਲਾਈ ਤੁਸੀਂ ਬਣਾ ਸਕੋ